ਸ਼ਲੋਕ ਮਹੱਲਾ ਪਹਿਲਾ ਮਰਦਾਨਾ ਕਲ ਕਲਵਾਲੀ ਕਾਮ ਮਦ ਮਨੂਆ ਪੀਵਣ ਹਾਰ ਕਰੋਧ ਕਟੋਰੀ ਮੋਹ ਭਰੀ ਇਲਾਵਾ ਅਹੰਕਾਰ ਪਹਿਲਾਂ ਆਪਾਂ ਇਹ ਗੱਲ ਸਪਸ਼ਟ ਕਰ ਲਈਏ ਕਿ ਇਹ ਜਿਹੜਾ ਸ਼ਲੋਕ ਹੈ ਇਹ ਗੁਰੂ ਨਾਨਕ ਸਾਹਿਬ ਦਾ ਹੈਗਾ ਤੇ ਮਰਦਾਨਾ ਇਹਦਾ ਸਿਰਲੇਖ ਹੈ ਹਾਂਜੀ ਰਮ ਮਰਦਾਨਾ ਦਾ ਸਿਰ ਜੇ ਦਰੂਜੇ ਮਰਦਾਨੇ ਸ਼ਲੋਕ ਪਹੁੰਚਾ ਤਾਂ ਸਤ ਕਰੇ ਦੇ ਹੁੰਦਾ। ਦੇ ਵਿੱਚ ਬਰਦਾਨੇ ਦੇ ਨੋਟੇ ਸ਼ਲੋਕ ਦਰਜ ਹੁੰਦਾ। ਕੁਝ ਬੀੜਾਂ ਵਿੱਚ ਵੈਸੇ ਲਿਖਿਆ ਹੋਇਆ ਵੀ ਹੈ ਸ਼ਲੋਕ ਮਹੱਲਾ ਪਹਿਲਾ ਮਰਦਾਨਾ ਜਾਂ ਸ਼ਲੋਕ ਮਰਦਾਨਾ ਮਹੱਲਾ ਪਹਿਲਾ ਪਰ ਇਹ ਛਾਪੇ ਵਾਲੀ ਬੀੜ 'ਚ ਇਹ ਨਹੀਂ ਆਇਆ। ਉਹ ਜਦੋਂ ਰਹੀ ਆਇਆ ਬਰਤਾਲ ਦਾ ਸ਼ਲੋਕ ਰਹੀ ਹੈ ਸ਼ਲੋਕ ਦੇ ਰੂਪਰ ਤਾਂ ਇਹ ਦੋ ਕੇ ਇੱਕ ਸ਼ਰਾਬ ਦੀ ਤਲਕ ਕੀਤੀ ਹੈ ਗੱਲ ਸ਼ਰਾਬ ਪੀ ਕੇ ਆਦਮੀ ਹੋ ਜਾਂਦਾ ਠੀਕ ਹੈ ਜੀ ਉਹ ਜੂਤ ਜਾਂਦਾ ਜਿਵੇਂ ਬਰਤਾਲ ਉਹ ਜੋ ਆਪਣੇ ਆਪ ਨੂੰ ਬਰਤਾਲ ਸੁਭਈਦਾ ਹੈ ਇਹ ਝੂਠ ਦੀ ਸ਼ਰਾਬੇ ਪੀਂਦਾ ਹੋਵੇ ਹੈ ਨਾ ਆਹ ਕੀ ਬਣੀ ਸੱਚਾ ਦਾ ਹੁਦਦਾਈ ਮਰਦਾ ਉਹ ਤੇ ਕਾਲ ਮਰਦੀ ਕਾਲ ਦੀ ਵੀ ਕਿਹਾ ਜਿਹੜੀ ਫੈਕਟਰੀ ਕਮਾਈ ਚੜੀ ਮਰਦਾ ਨਹੀਂ ਕਹਾਗਾ ਅੱਛਾ ਪੱਖ ਹੈਗਾ ਸ਼ਰਾਬ ਦਾ ਪੱਖ ਹੈ ਜੀ ਹੈ ਪਹਿਲਾ ਮਰਦਾਨਾ ਕਲ ਕਲਵਾਲੀ ਕਾਮ ਮਦ ਮਨੁਆ ਪੀਵਣ ਹਾਰ ਆਤਮਾ ਆਪਨਾ ਕਰਦੀ ਹੈ ਤੇ ਕਰ ਸਕਦੀ ਐ ਸਿਰਸੁਰ ਪ੍ਰੈਕਟੀਕਲ ਸ਼ੇਪ ਵੀਰੂ ਦੇ ਸਕਦੇ ਕੁਛ ਵੀ ਸੋਚ ਅਸੀਂ ਕੁਛ ਵੀ ਸਕਦੇ ਹਾਂ ਸੋਚ ਨੂੰ ਪ੍ਰੈਕਟੀਕਲ ਸ਼ੇਪ ਦੇਣੀ ਸਾਡੇ ਵਾਸਤੇ ਗੱਲ ਦੀ ਸੋਚਣ ਦਾ ਤਸੇ ਆਜ਼ਾਦ ਆ ਅੱਛਾ ਜੀ ਪ੍ਰੈਕਟੀਕਲ ਜਿਹੜਾ ਰੂਪ ਲੈਣਾ ਉਹ ਸਾਡੇ ਵਾਸਤੇ ਗੱਲ ਦੀ ਉਹ ਕਬਲ ਫੇਟਾ ਹੋਊਗਾ ਬਈ ਇਹੋ ਕੁਝ ਅਸਲ ਹੋਊਗਾ ਹੋਈ ਜੋ ਪਰਮੇਸ਼ਰ ਦੇ ਪਾਸੋਂ ਸੋਚ ਅਸੀਂ ਆਪਣੀ ਵੱਖਰੀ ਵੀ ਕਰਦੇ ਹਾਂ ਪਰਮੇਸ਼ਰ ਦੇ ਪਾਸੋਂ ਦੇ ਵੱਖਰਾ ਵੀ ਸੋਚ ਸੋਚ ਸਕਦੇ ਹੋ ਕਲ ਕੰਨ ਨਹੀਂ ਸਕਦੇ ਠੀਕ ਹੈ ਜੀ ਕਲ ਕਲਵਾਲੀ ਕਾਮ ਮਨੂਆ ਪੀਵਨ ਹਾਰ ਕਾਮਨਾਵ ਦੀ ਹੈ ਜੀ ਇੱਛਾ ਉਹੀ ਉਹਦਾ ਨਸ ਹੈ ਇਹ ਇੱਛਾ ਦੇ ਵਿੱਚ ਜੇ ਫਰੀਜੰਬੈ ਸੋਚਣ ਜੇ ਨਾ ਕਰਨੇ ਕਾਮ ਕਰਦਾ ਦੇ ਕਰਦਾ ਅੱਗੇ ਇਹ ਇਹ ਨਸ ਹੈ ਜਦਕੀ ਇਹ ਸਰਵ ਚੈ ਜਦਕੀ ਜੀਵ ਜੀਵ ਜੀਵ ਕਹਵਾ ਜੀਵ ਦਾ ਹੀ ਨਸ ਵੇ ਇਲਾਜ ਕਰਨ ਕਰਤਾ ਕੋ ਸੰਗਤਾਰ ਜੀ ਇਹ ਜਿਵੇਂ ਜਿਹੇ ਤੇ ਜਿੰਦਗੀ ਜਿੰਦਾ ਹੈ ਠੀਕ ਹੈ ਕਾਮੇ ਜਿਹੜੀ ਹੈ ਜੀ ਇਹ ਇਹ ਇਹਦੇ ਵਿੱਚ ਹੈ ਤੇ ਇਹ ਮਨ ਨੂੰ ਇਹਦਾ ਨਸ਼ਾ ਹੈ ਜੀ ਮਨੂ ਆ ਪੀਵਣ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਕਰੋਧ ਕਟੋਰੀ ਜੇ ਇਹ ਨਹੀਂ ਕਾਮੇ ਦੀ ਹੁੰਦੀ ਤਾਂ ਇਹ ਗੁੱਸਾ ਵੀ ਹੋ ਜਿਹੜੀਆਂ ਵੀ ਕਾਮਨਾ ਪੂਰੀ ਹੁੰਦੀ ਹੈ ਅੱਛਾ ਪੂਰੀ ਜ਼ਰੂਰ ਚ ਜਿਹੜਾ ਸਰੀਰ ਦੀ ਦੇ ਕਾਹ ਸੋਚਣ ਦੇ ਵਿੱਚ ਉਹ ਵੀ ਵਿੱਛੇ ਹੈ ਹੂੰ ਦੇ ਰੂਪ ਇਹਦਾ ਦਰਜ ਕਟੋਰੀ ਤਾਂ ਬਰਤਨ ਹੈ ਜਿਹਦੇ ਵਿੱਚ ਮੋਹ ਇਹਨੇ ਪਾਇਆ ਹੋਇਆ ਕਰੋਧ ਨੂੰ ਕਰਦੇ ਸਾਰੇ ਜਨ ठीक है क्रोध ਦਾ ਬਰਤਨ ਮੋਹ ਦਾ ਭਰਿਆ ਹੋਇਆ ਪਿਲਾਵਾ ਹੰਕਾਰ ਬ੍ਰੋਹ ਨੇ ਕੌਣ ਕਰ ਤੂੰ ਨਾਮ ਲੈਣਾ ਨਹੀਂ ਆਉਣਾ ਉਹ ਕਰਨਾ ਸਰਕੇ ਛੱਡੂਗਾ ਤੇ ਚਾਰ ਕੇ ਛੱਡੂਗਾ ਬ੍ਰੋਹ ਦਾ ਹੈ ਨਾ ਥਲੇ ਆਵੇ ਕਬੂਲੇ ਬ੍ਰੋਹ ਤੇ ਕਾਰ ਦੀ ਕੰਮ ਕਰਦੇ ਨੇ ਕਾਰ ਹਲਾ ਛੇਰੀ ਦੇ ਰਿਆ ਜਦੋਂ ਕਾਰ ਹਲਾ ਛੇਰੀ ਦਿਨ ਤੇ ਹਟ ਗਿਆ ਉਦੋਂ ਬੇਪਿਆਸ ਦੰਗੇ ਪੀ ਪੀ ਹੋਏ ਖਵਾਰ ਕੱਖਿਓ ਕੇ ਆਪਣਾ ਕਹਿੰਦਾ ਇੱਛਾ ਜ਼ਿਆਦਾ ਬਿੱਲੂ ਇੱਛਾ ਜ਼ਿਆਦਾ ਮਿਲੈ ਜਿੰਨੇ ਦੁਨੀਆ ਵੀ ਬਝਲਤ ਹੈ ਉਹਦੇ ਕਿ ਲੋਪਰਦਾਨ ਆਪਸ ਵਿੱਚ ਜਿਵੇਂ ਹੈ ਹਰੇਕ ਕਿ ਜ਼ਿਆਦਾ ਚਾਹੁੰਦਾ ਬਿੱਲੂ ਜ਼ਿਆਦਾ ਬੁਲੇ ਇਕ ਤਾਂ ਨਹੀਂ ਹੈ ਇਕ ਤਾਂ ਲੋਕ ਦੀ ਦੁੱਧ ਭਜਲਸ ਪੂਰੀ ਲੱਭ ਕੀ ਖੁਆਰੀ ਮੀਂਹ ਜਦ ਹੀ ਆਇਆ ਜਿਆਦਾ ਖੁਆਰੀ ਹੈ ਮੇ ਤੰਕ ਖੁਆਰੀ ਬੰਦ ਜਿਆਦਾ ਪੀਵੇ ਉਹਨੂੰ ਵੀ ਖੁਆਰੀ ਹੈ ਜਿਆਦਾ ਪੀਵੇ ਰਾਜੀ ਹੈ ਹਰੇਕ ਆਦਮੀ ਤੇ ਸੱਕੇ ਪੀਣ ਲੱਗ ਰਹਿਣਗੇ ਜਿਆਦਾ ਪੀਵੇ ਜਿਆਦਾ ਪੀ ਕੇ ਫੇਕੀ ਹੋ ਖੁਆਰੇ ਹੋ ਇਹ ਜਿਹੜੀ ਗੱਲ ਹੈ ਇਹ ਫਿਰ ਉਹ ਦੁਰਮਤ ਹੈ ਜੀ ਇਹ ਸਭ ਦੁਰਮਤ ਦੀਆਂ ਨਿਸ਼ਾਨੀਆਂ ਹਨ। ਉਹਦੀ ਦੁਰਮਤ ਦਾ ਰੂਪ ਹੈ। ਦੁਰਬੁਧ ਕੀ ਕਰ ਰਹੀ ਹੈ ਕੀ ਕਰਾ ਰਹੀ ਹੈ ਉਹਨਾਂ ਰੂਪ। ਤੇ ਫਿਰ ਜਿਹੜਾ ਉਹ ਸ਼ਲੋਕ ਹੈਗਾ ਪਤ ਕੰਮਲੀ ਉਹ ਫਿਰ ਇਹਦੇ ਨਾਲ ਮਿਲ ਕੇ ਚੱਲਦੀ ਗੱਲ ਹੈ ਜੀ। ਕਾਰੀ ਉਹ ਗੱਲ ਉੱਤੇ ਬਿੜੀ ਪਈਆ। ਅਲਸ ਉਹ ਹੀ ਆ ਸਾਦੀ ਲਤਖਾ ਉਹਦਾ ਉਹ ਬਾਰ ਬਾਰ ਉਹਦੀ ਦਾ ਸੀ। ਹਾਂ ਜੇ ਤੀਰ ਫਾੜ ਕੀਤੀ ਵਿੱਚ ਵੀ ਕੁਝ ਨਿਕਲਿਆ ਤੇ ਚੱਲਦੀ ਹੈ ਕਿਧਰੋਂ ਦੀ ਕਰਦੀ ਹੈ ਗੁਰਬਾਣੀ ਐਸੇ ਦੰਤੀ ਗੱਲ ਕਰਦੀ ਹੈ ਇਹ ਹੀ ਵਿਛੋੜਦੀ ਹੈ ਫਿਰ ਮੇਰੇ ਸੰਸਾਰ ਨੂੰ ਪਾਇਆ ਹੈ ਮਨ ਪੀ ਰਿਹਾ ਉਹ ਦੂਸਰੀ ਸ਼ਰਾਬ ਤਾਂ ਫਿਰ ਸਰੀਰ ਪੀਂਦਾ ਇਹ ਮਨ ਪੀ ਰਿਹਾ ਤਾਂ ਇਹ ਖਵਾਰੀ ਕਰ ਰਹੀ ਹੈ ਹਰ ਨਾ ਮਾਨ ਪਿੰਡ ਦਾ ਰਸੀਗਾ ਗਿਆ ਰਸੀਗਾ ਦਾ ਪੀਰ ਬਾਦ ਅਸਬੇ ਨਾ ਘਰ ਵਦ ਠੀਕ ਹੈ ਜੀ ਇਹਦੇ ਨਾਲ ਮਜ਼ਬੂਤ ਹੁੰਦੀ ਹੈ ਇਹਦੇ ਕਰਨੀ ਲਾਹਣ ਖੱਤ ਗੁੜ ਸੱਚ ਸ਼ਰਾ ਕਰਸਾਰ ਜੇ ਸੱਚ ਨੂੰ ਜਾਂਦਾ ਤਦ ਨੂੰ lahal banaya janda lahan to ki pa bhai oh jide vich gol mangai da panjnu lahan kehnde ne kehnda pa oda mul gude hunda hai ta je mul ਸੱਚਾ ਕਰਨਾ ਲਗਦਾ ਲੋਕਾਂ ਨੂੰ ਸਾਚ ਗੋੜ ਵਰਗਾ ਲਗਦਾ ਸਤ ਗੁੜ ਸੱਚਾ ਸੱਚਾ ਜੀਵਨ ਉਪਤੀ ਕਰਮ ਨੂੰ ਦਾ ਠੀਕ ਹੈ ਜੀ ਸੱਚ ਸ਼ਰਾ ਕਰਸਾਰ ਰੂਪੇ ਸੱਚ ਨਾਲ ਵਿਚਾ ਚਰਦਾ ਜੇ ਉਹ ਚਲਣ ਦਾ ਆਪਣਾ ਹੁੰਦਾ ਚਾਹੇ ਉਹ ਗਰੀਬ ਹੋਵੇ ਚਾਹੇ ਉਹ ਨੁਕਸਾਨ ਹੋ ਜਾਈ ਉਹ ਸੱਚ ਨਾਲ ਹੁੰਦਾ ਉਹ ਸੱਚ ਬੋਲੇ ਬੇਦੂ ਬੇਰੇ ਚੱਲ ਦੂਜਾ ਹੱਕ ਨਹੀਂ ਖਾਣ ਤੇ ਇੱਕ ਜਗ੍ਹਾ ਸੱਤ ਗੁਰ ਲਿਖਦੇ ਆਂ ਦੂਜੀ ਜਗ੍ਹਾ ਸੱਚ ਸ਼ਰਾ ਲਿਖਦੇ ਆਂ ਤਾਂ ਇਹ ਦੋਵਾਂ ਅੱਖਰਾਂ ਦਾ ਇੱਕੇ ਪਾਵ ਬਣਦਾ ਜੀ ਸੱਤ ਤੇ ਸੱਚ ਦਾ ਗੁਰ ਤਾਂ ਹੀ ਬਣਦੀ ਐ ਹੁਣ ਤਾਂ ਸਵਾ ਪਹਿਲਾਂ ਮਿੱਠਾ ਫਿਰ ਖੱਟਾ ਫਿਰ ਕੋਹੜਾ ਅੱਛਾ ਜੀ ਸਵਾਦ ਆ ਉਹਦਾ ਬਦਲਦਾ ਬਾਕੀ ਪਾਣੀ ਤਾਂ ਪਾਣੀ ਪਾਣੀ ਦਾ ਕੁਝ ਨਹੀਂ ਬਦਲਦਾ ਪਾਣੀ ਦਾ ਪਾਇਦਾ ਕੋਹੜ ਨਹੀਂ ਬਦਲਦਾ ਅਸਲ 'ਚ ਉਹ ਗੁਣ ਨੇ ਹੀ ਕਹਾ ਜਾਂ ਕੇ ਫਿਰ ਸ਼ਰਾ ਸ਼ਰਾ ਸ਼ਰਾਬ ਨੂੰ ਕਹਿੰਦੇ ਸੱਚ ਸ਼ਰਾ ਕਰਸਤ ਹਾਂ ਗੁਣ ਨਹੀਂ ਸ਼ਰਾਬ ਵਰਦੇ ਠੀਕ ਹੈ ਤੇ ਇਹਨੂੰ ਅਸੀਂ ਰਹਿਣਾ ਉਹ ਸ਼ਰਾ ਲੱਗ ਹੈ ਇਹ ਅੱਖਰ ਲੱਗੇ ਹਨ ਜੀ ਆਂ ਸ਼ਰਾ ਸੱਚ ਸ਼ਰਾ ਦੀ ਗੱਲ ਕਰਦੇ ਹੁਣ ਹੋ ਸਕਦਾ ਹਾਂ ਠੀਕ ਹੈ ਜੀ ਗੁਣ ਮੰਦੇ ਕਰ ਸੀਲ ਕਿਉਂ ਸ਼ਰਮ ਮਾਸ ਆਹਾਰ ਗੁਰੂਆਂ ਨੇ ਬਣੇ ਜਾਈਦੇ ਨੇ ਨਾਲ ਰੋਟੀ ਗੁਰੂ ਗੁਰੂ ਰੂਪੀ ਬੰਦੇ ਪ੍ਰਸ਼ਾਦੇ ਅੱਧਾ ਪਿੱਛੇ ਭੁੱਲ ਜਵੇ ਸਭ ਪਿੱਛੇ ਭੁੱਲ ਕੇ ਬਣ ਜਵੇ ਗੁਰ ਗੁਰ ਦੀ ਨੁਕਸਾਨ ਨਫਾ ਦੇ ਵਾਰ ਬੜਦੇ ਹੈ ਅਪਤ ਰਹੂਦੀ ਤੇ ਵਾਰ ਬੜਦੇ ਹੀ ਮੰਦੇ ਸਭ ਉੱਤੇ ਅਰੇ ਕਨੂੰ ਆਪਣਾ ਬਨੋੜਾ ਹੀ ਬਨੋੜੇ ਚਾਹੇ ਕਿੰਨੇ ਉਹ ਸਾਡਾ ਨਫਰ ਕਰਦਾ ਅਸੀਂ ਕਿੰਨੇ ਉਹ ਨਫਰ ਕਰਦੇ ਸੀਗੇ ਪਿਛਲੀ ਮੌਰਖਤਾ ਤੇ ਆਗਦੇ ਦੀ ਹਾਂਜੀ ਕਰੀ ਸੀਲ ਘੋ ਸ਼ਰਮ ਮਾਸ ਨੂੰ ਵਿਵਸਾਰਾ ਨੂੰ ਕਿ ਹੋਵਣ ਲਈ ਵਿਵਸਾਰਾ ਕਿ ਕੰਮ ਕਰੂਗੀ ਲੀਵਾ ਵਗੀ ਦਿਵਸ ਸਭ ਤੋਂ ਹੱਥ ਜੋੜਦੀ ਸਭ ਨੂੰ ਬੜਾਲ ਬੇਗਰੀਬ ਉਹਨਾਂ ਜੋਪੜੇ ਜਾਣਗੇ ਠੀਕ ਹੈ ਕਹਿੰਦਾ ਭਾਬੀ ਜੇ ਗੁਣ ਰੂਪੀ ਮੰਡੇ ਬਣਾਏ ਐ ਉਹਨਾਂ ਨੂੰ ਸੀਲ ਰੂਪੀ ਘੋ ਦੇ ਨਾਲ ਚੋਪੜ ਜੀ ਜੀ ਵਿਬਰਤਾ ਹੈ ਤਾਂ ਬੋਲਦੇ ਸੱਤ ਉਧਰ ਤੱਤ ਤੱਤ ਰੂਪੀ ਬਿਲਕੁਲ ਤੱਤ ਦੀ ਗੱਲ ਕਰ ਕਿ ਹੋਰ ਦੀ ਗੱਲ ਕਰ ਠੀਕ ਹੈ ਜੀ ਸ਼ਰਮ ਮਾਸ ਆਹਾਰ ਜਿਹੜੀ ਸ਼ਰਮ ਬੇਇਜ਼ਤੀ ਹੈ ਇਹ ਮਾਸ ਆਹਾਰ ਵਾਸੇ ਆਹਾਰ ਹੈ ਕੁਛ ਖਾਲਾ ਆਹਾਰ ਬਾਸੇ ਜੇ ਦਮਦਰ ਵੇ ਸਰਬ ਜਿਹੜੀ ਜੇ ਸ਼ਰਮ ਦੂਸਰੀ ਵੀ ਲਾ ਲਾਂਗੇ ਤਾਂ ਵਾਸ ਆਹਾਰ ਦੇ ਸ਼ਰਮ ਕਿਹੜੀ ਪਊਗੀ ਮਾਸ ਖਾਣੇ ਨਾਲ ਖਾਣੇ ਚਲੜਾਈ ਦੀ ਇਹ ਧਰਮ ਦਾ ਬੇਚਾਨੀ ਮਾਸ ਖਾਣੇ ਦੀ ਖਾਦੋ ਕਿ ਉਹ ਤਾਂ ਕਬਲੇ ਆਗੇ ਪਿੱਛੇ ਇਹਦੇ ਵਿੱਚ ਹੀ ਵਾਸ ਹੈ ਆਹ ਇਹ ਤੋਂ ਵਧੀਆ ਆਹਾਰ ਹੈ ਨਹੀਂ ਕੋਈ ਤੇ ਦੁਨੀਆ ਇਸ ਤਰ੍ਹਾਂ ਲੱਗਦਾ ਜਿਹੜੇ ਰਾਜਾ ਸ਼ਾਹੀ ਆਪਣੇ ਆਪ ਨੂੰ ਦੁਨੀਆ ਦੇ ਅਮੀਰ ਲੋਕ ਸਮਝਦੇ ਆ ਉਹ ਇੱਕ ਤਾਂ ਸ਼ਰਾਬ ਦੀ ਵਰਤੋਂ ਕਰਦੇ ਆ ਦੂਸਰਾ ਉਹਨਾਂ ਕੋਲ ਕਿਓ ਦੀ ਖੁੱਲ ਹੁੰਦੀ ਹੈ ਤੀਸਰਾ ਉਹ ਮਾਸ ਦਾ ਹਾਰ ਕਰਦੇ ਆ ਮੁਖਰੂਪੀ ਭਗਤ ਹੈਗਾ ਉਹਨਾਂ ਵਾਸਤੇ ਵੀ ਇਹ ਤਿੰਨੇ ਚੀਜ਼ਾਂ ਇੱਥੇ ਲਿਖੀਆਂ ਜੀ ਤੇ ਦੀ ਖੁਰਾਕ ਹੈ ਗੁਣ ਇਹ ਇੱਥੇ ਸਭ ਤੋਂ ਮੂਲ ਗੱਲ ਹੈ ਜੀ ਗੁਣ ਕਰਕੇ ਮੰਡਿਆਂ ਚ ਢਿਲ ਕਿਉ ਹੈਗਾ ਤੇ ਇਹਦੇ ਕਰਕੇ ਸ਼ਰਮ ਮਾਸ ਆ ਹੈ ਠੀਕ ਹੈ ਜੀ ਉਹਦੇ ਵਿੱਚੇ ਮਾਸ ਹੈ ਤੁਤੇ ਦੇ ਵਿੱਚ ਮਾਸ ਹੈ ਦੁੱਧ ਚ ਕਿਉਂ ਪਹਿਲਾਂ ਜਿਹਨੇ ਖਾ ਲਿਆ ਮਾਸ ਵੀ ਖਾ ਲਿਆ ਠੀਕ ਹੈ ਜੀ ਕਿਤੇ ਦੁੱਧ ਪੀ ਲਿਆ ਮਾਸ ਖਾ ਲਿਆ ਪਹਿਲਾਂ ਹੀ ਦੁੱਧ ਮਾਸ ਹੋਇਆ ਹੈ ਛੇੜੀ ਖੁਰਾਕ ਵੀ ਦੁੱਧ ਹੀ ਹੈ ਸ਼ੁਰੂ ਜੇ ਬੱਚਾ ਦੁੱਧ ਤੋਂ ਇਦਾ ਮਾਸ ਦਾ ਮਾਸ ਨਹੀਂ ਦਾ ਘੜਦਾ ਮਾਸ ਦਾ ਮਾਸ ਏ ਖਾ ਰਿਆ ਉਹ ਰੂਪ ਬਦਲਿਆ ਹੈ ਇਹ ਮਾਸ ਦਾ ਰੂਪ ਦੂਆ ਹੋਇਆ ਹੋਇਆ ਠੀਕ ਹੈ ਤਾਂ ਫੇਰ ਮਾਸ ਤੋਂ ਹੀ ਮਾਸ ਹੈ ਜੋ ਪੈਦਾ ਹੋਇਆ ਉਹ ਬਾ ਸੇ ਬੱਚਾ ਦੁੱਧ ਤੋਂ ਮਾਸ ਇਹਦਾ ਮਾਸ ਮਾਸ ਇਸੇ ਰੂਪ ਦਾ ਫਰਕ ਹੈ ਪਰ ਤੁਸੀਂ ਖਾਣ ਨਾਲ ਮਾਸ ਬਦਲਿਆ ਸਾਡੇ ਸਰੀਰ ਦਾ ਚਾਹੇ ਮਿੱਟੀ ਵੀ ਸੀ ਉਹ ਮਾਸ ਏ ਠੀਕ ਹੈ ਜੀ ਗੁਰਮੁਖੀ ਪਾਈਐ ਨਾਨਕਾ ਖਾਦੇ ਜਾਏ ਵਿਕਾਰੰ ਕਹਿੰਦਾ ਗੁਰਮੁਖਾ ਐਸੇ ਬੰਦੇ ਦੇ ਵਸਤੂ ਹੈ ਗੁਰਮੁਖਾ ਨੂੰ ਖਾਦੇ ਜਾਏ ਵਿਕਾਰ ਜੇ ਖਾਵੇ ਤਾਂ ਵਿਕਾਰ ਚਲੇ ਜਾਂਦੇ ਨੇ ਔਪਣ ਚਲੇ ਜਾਂਦੇ ਨੇ ਲੋਭ ਚਲਾ ਜਾਂਦਾ ਜਾਂਦਾ ਹੈ ਵਿਪਰਤਾਂ ਦੇ ਅੱਗੇ ਕੁਝ ਨਹੀਂ ਖੰਦਾ ਸਾਰੇ ਹਾਰ ਖਾ ਜਾਂਦੇ ਨੇ ਵਿਵਰਤਾਂ ਗੱਤੇ फडਕ ਨਾ ਜਾਵੇ ਹਰ ਸਾਰੇ ਸ਼ਾਂਤ ਹੋ ਠੀਕ ਪਹਿਲਾ ਮਰਦਾਨਾ ਕਾਇਆ ਲਾਹਣ ਆਪ ਮਦ ਮਜਲਸ ਤ੍ਰਿਸ਼ਨਾ ਮਨਸਾ ਟਟੋਰੀ ਕੂੜ ਭਰੀ ਇਲਾਏ ਜਮਕਾਲ ਅੰਦਰ ਹਿਰਦੇ ਵਿੱਚ ਆਪਣੀ ਵਰਦੀ ਚੱਲਦੀ ਹੈ ਅੱਛਾ ਗੁਰਕਾ ਬਾਣ ਨਹੀਂ ਠੀਕ ਹੈ ਜੀ ਉਹ ਨਾ ਮੈਂ ਨਾ ਆਪਣੀ ਬਦੀ ਦਾ ਵੀ ਤਾਂ ਹੈ ਰਾਜੇ ਬਾ ਰਾਜਾ ਨੂੰ ਆਪਣੀ ਮਰਜ਼ੀ ਦੇ ਤੋ ਹੈ ਹੁੰਦਾ ਹਾਂ ਹਾਂਜੀ ਵੀ ਆਪਣਾ ਪਾਣਾ ਨਾ ਗੁਰਤਾ ਪਾਣਾ ਦੋਸਦਾ ਹੀ ਰਹਾ ਕਿ ਆਪੇ ਹੋਇਆ ਬੈਠਾ ਆਪਣੀ ਹਿਰਦੇ ਚ ਕਿਸੇ ਦੀ ਸੁਣਦਾ ਹੀ ਨਹੀਂ ਅੰਦਰ ਤ੍ਰਿਸ਼ਨਾ ਹੀ ਆ ਬਦੋ ਤੇ ਜਿਵੇਂ ਹਾਤ ਬੋਲ ਭਜਿਆ ਖੁੱਲਦਾ ਸਤਸਾਲੀ ਪਤਾਰਸਾ ਨੂੰ ਤ੍ਰਿਸ਼ਨਾ ਨੂੰ ਬੈਠੇ ਰਹਿ ਜਾਂਦੀ ਤ੍ਰਿਸ਼ਨਾ ਕਰਕੇ ਮਨ ਭਜਿਆ ਫਿਰਦਾ ਬੱਜਲਸਤੋ ਕੀ ਭਾਵਨ ਦਾ ਜਿੱਥੇ ਇਕੱਠੇ ਹੋ ਕੇ ਲੋਕ ਬੈਨੇ ਆ ਜੀ ਬੱਜਲਸੋ ਦੀ ਸੋਸਾਇਟੀ ਅੱਬਕ ਠੀਕ ਹੈ ਜੀ ਵੀ ਜਿਹੜਾ ਮਨ ਧਾਰਿਆ ਉਹ ਜਿਹੜੀ ਅੰਦਰ ਤੇਸ਼ਨਾ ਉਹ ਸੰਗਤ ਜੀ ਮਨਸਾ ਕਟੋਰੀ ਕੂੜ ਭਰੀ ਪਿਲਾਏ ਜਮਕਾਲ ਗੋਦੀਆਂ ਖਿਆਵਾਂ ਪਈ ਹੋਈ ਜਿਹੜੀ ਕਟੋਰੀ ਕਟੋਰੀ ਕੂੜ ਭਰੀ ਛੁੱਟੀ ਹੈ ਬਿਲਕੁਲ ਉਹ ਕੰਮ ਕਰ ਰਹੀ ਜੂੜੇ ਜੂੜਾ ਵੀ ਫਿਰ ਆਇਆ ਜਮਕਾਲ ਜਮਕਾਲ ਬੜਾ ਰਿਹਾ ਇਹ ਚੂੜੀ ਪੜਾਈ ਜਮਕਾਲ ਬੜਾ ਰਿਹਾ ਛੱਤੀ ਪੜਾਈ ਆ ਪੜਾ ਰਿਹਾ ਪਰਮੇਸ਼ਰ ਇਹ ਮੰਨ ਲੈ ਚਿੱਤ ਸੱਚੀ ਪੜਾਈ ਬੜਾ ਠੀਕ ਹੈ ਉਹ ਗੱਲ ਇੱਥੇ ਮਦ ਪੀਤੇ ਨਾਨਕਾ ਬਹੁਤੇ ਖੱਟੀਆਂ ਵਿਕਾਰ ਇਹ ਕੇ ਲੈ ਕੇ ਜਾਵਾਂਗੇ ਤੁਹੇ ਇਹ ਰਸਤਾ ਜਿਹੜਾ ਹੈਗਾ ਬੁਕਾਰਾਂ ਦੇ ਵਜ਼ਨ ਦਾ ਰਸਤਾ ਹੈ ਬੁਕਾਰਾਂ ਦੀ ਖੱਟੀ ਐ ਇਸ ਰਸਤੇ ਜਿਹੜਾ ਆਪਣੇ ਪਾਣੇ ਬਕਾਇਾਂ ਦੀ ਖੱਟੀ ਐ ਜੀ ਬਿਲਕੁਲ ਆਪਣੇ ਪਾਣੇ ਚੱਲਣ ਬਕਾਇਾਂ ਦੀ ਖੱਟੀ ਠੀਕ ਐ ਜੀ ਗਿਆਨ ਗੁੜ ਸਲਾਹ ਮੰਡੇ ਭੋ ਮਾਸ ਆਹਾਰ नानक ही भोजन ਸਚ है सच ਨਾਮ आधार के ज्ञान गुण बना लिए के गुण गुण दे ज्ञान गुण बना लिए सब चलावे भले होन सब प्रजा दे होन ਨਾਲ ਇੱਕ ਰੋਟੀ ਹੁੰਦੀ ਹੈ ਕੋਈ ਪੀਣ ਵਾਲੀ ਚੀਜ਼ ਹੈ ਤੇ ਇੱਕ ਜਿਹਨੂੰ ਆਪਾਂ ਕਹਿੰਦੇ ਸਲੂਨਾ ਇਹ ਉਸ ਤਰ੍ਹਾਂ ਨਹੀਂ ਆ ਰਹੀ ਹੈ ਗੱਲ ਵੀ ਗਿਆਨ ਗੁਰ ਹੋਵੇ ਠੀਕ ਹੈ ਜੀ ਗਿਆਨ ਗੁਰ ਸਲਾਹ ਮੰਡੇ ਭਾਉ ਮਾਸ ਆਹਾਰ ਜਿਹੜਾ ਗਿਆਨ ਗੁਰ ਸਭ ਸਲਾਹ ਜਾ ਕੇ ਮੁਰਲੇ ਰੂਪ ਬਦਲ ਜਾਂਦੇ ਠੀਕ ਭੁੱਖ ਹੋਵੇ ਉਹਦੀ ਭੁੱਖ ਆਹਾਰ ਜੇ ਭੁੱਖ ਹੋਵੇ ਹੋਣਾ ਹੋਵੇ ਤੇ ਹਿਰਦੀ ਭੁੱਖ ਹੋਵੇ ਹੋਰ ਤੇਰੀ ਦੀ ਭੁੱਖ ਹੋਵੇ ਫਿਰ ਦਿਖਲ ਬੰਦੀ ਭੁੱਖ ਵੀ ਇਹਦੀ ਹੋਵੇ ਫਿਰ ਇਹ ਬਾਸ ਆਹਦਾ ਕਿ ਮੈਂ ਬਾਸ ਸਭ ਤੋਂ ਲੋਕ ਅਮੀਰਾਂ ਦੀ ਖੁਰਾਕ ਚ ਰਿਹਾ ਹਮੇਸ਼ਾ ਨਾਨਕ ਇਹ ਭੋਜਨ ਸੱਚ ਹੈ ਸੱਚ ਨਾਮ ਆਧਾਰ ਭੋਜਨ ਸੱਚ ਹੈ ਲਬ ਬਹਿਸ ਤੋਂ ਜਨ ਜੀ ਇਹ ਸੱਚ ਨੂੰ ਅਧਾਰ ਹੈ ਜੇ ਅਧਾਰ ਨਾ ਡੋਲੇ ਨਾ ਡੁੱਬੇ ਤੁਪਸਾਦਰ ਵਿੱਚ ਅਧਾਰ ਇਹ ਲੋਪਦਾਈ ਸੱਚ ਨਾਮ ਦਾ ਅਧਾਰ ਹੈ ਭਵਸਾਕਰ ਬਚਾਉਣ ਵਾਲਾ ਜਿਹੜੀਆਂ ਗੱਲਾਂ ਆਪਾਂ ਕਰੀਆਂ ਇਹਦੇ ਹੁਣ ਤੱਕ ਇੱਕ ਤਾਂ ਗੁਣ ਹੋ ਗਿਆ ਜੀ ਗੁਣ ਸਭ ਤੋਂ ਵੱਡੀ ਗੱਲ ਹੈ ਸਭ ਤੋਂ ਵੱਡੀ ਥੱਲੇ ਗੁਣ ਗੁਣ ਦੇ ਗਿਆਨ ਪ੍ਰਾਪਤ ਹੋਏ ਠੀਕ ਹੈ ਉਸ ਤੋਂ ਬਾਅਦ ਫੇ ਗਿਆਨ ਆਈਏ ਦੂਸਰੀ ਗੱਲ ਕਿ ਗਿਆਨ ਹੋਣਾ ਗਿਆਨ ਗੁਰ ਸਲਾਹ ਗਿਆਨ ਦੇ ਬਿਨਾਂ ਤਾਂ ਹੀ ਨਹੀਂ ਕਰ ਸਕਦੇ ਝੂਠਾ ਹੀ ਨਹੀਂ ਕਰ ਸਕਦੇ ਚੀਜ਼ ਖਾ ਲੈ ਆਪੇ ਲੇ ਕੇ ਸਰ ਤੇ ਸਲਾਹ ਜਿਹੜੀ ਹੈ ਇਹ ਮੰਡੇ ਆਈ ਦਾ ਪ੍ਰਸ਼ਾਦਾ ਹੈਗਾ ਇਹ ਗੁਰਮਤ ਦਾ ਆਧਾਰ ਹੈ ਜੀ ਹੈ ਇਹ ਤੋਂ ਇਹ ਨਾਲ ਸੱਚ ਤੱਕ ਪਹੁੰਚੇ ਜਾ ਸਕਦਾ ਕੋ ਗਿਆਨ ਦੇ ਬਿਨੂੰ ਲੋਕ ਕੁਝ ਤੇ ਕੁਝ ਪੜਾਈ ਜਾਂਦੇ ਗਿਆਨ ਤੇ ਬਿਨਾਂ ਕੁਝ ਤੇ ਕੁਝ ਤਨ ਗਈ ਤੇ ਧਰਮ ਹੈ ਤਾਂ ਗਿਆਨ ਤਾਂ ਆਉਣਾ ਹੀ ਚਾਹੀਦਾ ਵਿੱਚ ਹੈ ਜੀ ਕਰਮ আর ਧਰਮ ਰੇਤੇ ਦੇ ਵਿੱਚ ਖੰਡ ਵਖੇਰ ਸੀ ਗਿਆਨ ਅੱਖ ਤੇ ਬਿਨਾਂ ਜਾਣ ਵਾਲੇ ਅੱਖ ਖੁੱਲੀ ਤੇ ਬਿਨਾਂ ਉਹ ਰੇਤਰ ਖੰਡ ਦੇ ਕਿੰਨੇ ਤਾਰੂਦਾ ਖੰਡਾ ਰੇ ਵਿਚੋਂ ਲੰਬੜੀ ਆ ਪਰ ਗਿਆਨ ਨਾਲ ਸੁਬਿਧਾ ਕੇ ਛੁਗੜੀ ਪਾਣੀ ਇਹ ਤਾਰੂਦਾ ਬਿਨਾ ਗਿਆਨ ਦੇ ਛੁਗੜੀ ਹੁੰਦੀ ਰੋਸ਼ਨੀ ਜ਼ਿਆਦਾ ਹੈ ਉਹ ਰੋਸ਼ਨੀ ਨੇ ਫੈਸਲਾ ਕਰਨਾ ਘੱਟ ਰੋਸ਼ਨੀ ਸ਼ੰਕਾ ਪਾ ਰਹੀ ਹੈ ਘੱਟ ਗਿਆ ਸ਼ੰਕਾ ਜਵਾਦੂ ਜਦ ਗਿਆਨ ਪੂਰਾ ਹੋਊਗਾ ਉਹ ਰਤੀ ਸੇ ਸ਼ਕਤੀ ਗਿਆਨ ਠੀਕ ਹੈ ਇਹ ਸਾਰੇ ਪੱਖੋਂ ਫਿਰ ਸ਼ਲੋਕ ਜਿਹੜਾ ਪੂਰਨ ਹੈ ਜੀ ਕਿਉਂਕਿ ਇੱਕ ਪਾਸੇ ਤਾਂ ਜਹਾਂ ਗਿਆਨ ਤੇ ਧਰਮ ਹੈ ਦੂਸਰੇ ਪਾਸੇ ਆਪਾਂ ये ਆ ਬੋਲੀਏ ਸੱਚ ਧਰਮ ਇੱਥੇ ਵੀ ਧਰਮ ਦੀ ਗੱਲ ਆ ਗਈ ਹੈ ਜੀ ਸੱਚ ਨੂੰ ਬਿਲਕੁਲ ਬਿਲਕੁਲ ਬਿਲਕੁਲ ਇਹ ਭੋਜਨ ਸੱਚ ਹੈ ਸੱਚ ਨਾਮ ਦਾ ਠੀਕ ਹੈ ਜੀ ਇਸ ਤੋਂ ਬਾਅਦ ਤੀਸਰਾ ਜਿਹੜਾ ਹੈ ਉਹ ਇੱਥੋਂ ਸ਼ੁਰੂ ਹੁੰਦਾ ਕਾਇਆ ਲਾਹਣ ਆਪ ਮਦ ਅੰਮ੍ਰਿਤ ਤਿਸ ਕੀ ਧਾਰ ਸਤ ਸੰਗਤੀ ਸਿਉ ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਿਕਾਰ ਇਹ ਤਾਂ ਉੱਪਰਲੇ ਸ਼ਲੋਕ ਨਾਲੇ ਮਿਲ ਕੇ ਚੱਲ ਰਿਹਾ ਜੀ ਉੱਥੇ ਕਾਇਆ ਲਾਹਣ ਆਪ ਮਦ ਕਿਹਾ ਸੀ ਇੱਥੇ ਵੀ ਕਾਇਆ ਇੱਥੇ ਲਿਖਿਆ ਹੋਇਆ ਕਾਇਆ ਉੱਥੇ ਕਾਇਆ ਈੜੀ ਨਾਲ ਲਿਖਿਆ ਇੱਥੇ ਯਈਏ ਨਾਲ ਲਿਖਿਆ ਕੋਈ ਫਰਕ ਪੈਂਦਾ? ਕਾਇਆ ਯਈਏ ਨਾਲ ਲਿਖਿਆ ਤਾਂ ਕਾਇਆ ਹੋਰ ਉਹਦੀ ਰੋਲ ਅਦਲ ਨਹੀਂ ਸ਼ਰੀਰ ਵਿੱਚ ਬਿਲਕੁਲੇ ਠੀਕ ਹੈ ਜੀ ਕਾਇਆ ਲਾਹਣ ਆਪਮਦ ਅਮਰਤ ਇਸ ਧਾਰ। ਅਮਰਤ ਆ ਤਾਂ ਮਾਇਆ ਕਰਨਤੀ ਵਿੱਚੋਂ ਬਿਲਕੁਲ। ਠੀਕ ਹੈ ਜੀ। ਕਾਇਆ ਉਹਨੂੰ ਜਿਹਦਾ ਆ ਗਿਆ ਕੱਲਾ। ਜਿਹਦਾ ਵਿਚਾਰ ਹੋ ਰਹੀ ਹੈ। ਮਤੋਬਰ ਧਾਰਾ ਨਿਕਲਦੀ ਗੁਰ ਪ੍ਰਸਾਦ ਕਾਬੇ ਅਮਰ ਧਾਰਾ ਗੁਰਬਾਣੀ ਦੀ ਗੁਰਬਾਣੀ ਦੀ ਵਿਚਾਰ ਦੀ ਗੱਲ ਹੈ ਇੱਥੇ ਇੱਥੇ ਬਿਲਕੁਲ ਵੱਲ ਇਸੇ ਦੀ ਗੱਲ ਹੀ ਖਤਮ ਉਹਦੀ ਧਾਤ ਕੀ ਹੈ ਪੈਦਾ ਤਾਂ ਉਹ ਵੀ ਹੈ ਪਰ ਅਮਰ ਪਿੱਛੇ ਪੈਦਾ ਹੈ ਤਾਂ ਉਹਦੀ ਵੀ ਹੈ ਉਹ ਕਤਾਰੂ ਵੀ ਹੈ ਛਿਆਤਾਰੂ ਵੀ ਹੈ ਬਹੁਤ ਬੁਰਤ ਦੀ ਇੱਛਾ ਆਜੋ ਅਮਰਤ ਹੋਰ ਚਾਹੀਦਾ ਨਿਰਕਾਰੀ ਨਿਰਕਾਰੀ ਦਾਤੂ ਹੈ दुखर दी धार प्राप्त करन वास्ते पिछा सत संगति सूं मिलाप होए लिव कटोरी अमृत भरी पी पी कटें विकार जेके जे सत संपत्ति नाल सच लो जुड़या होया आधुई नाल ਜਿਵੇਂ ਨਾ ਨੁਕੀਏ ਗੋਣਾਂ ਦੇ ਗੋਣਾਂ ਦੇ ਗੋਣਾਂ ਦਾਸ ਨੂੰ ਬਿਲ ਗਿਆ ਲੈ ਸਤ ਸੰਤਿ ਬਿਲ ਗਿਆ ਹੋਏ ਠੀਕ ਹੈ ਜੀ ਸਤ ਜਿਪ ਘਟੋਰੀ ਲੱਗ ਜਾਂਦੀ ਹੈ ਘਟੋਰੀ ਅਮਰਪਰਾ ਭਰ ਜਾਂਦੀ ਹੈ ਜੋ ਜੋ ਪੀ ਜਾਂਦੇ ਵਿਕਾਰ ਸਭ ਬਾਹਰ ਚਲੇ ਜਾਂਦੇ ਨੇ ਦਿੰਦੇ ਚੋ ਬੁਕਾਰੇ ਬਾਹਰ ਨਿਕਲ ਜਾਂਦੇ ਨੇ ਸਾਰੇ ਗੋਣ ਦਾਸ ਗੋਣ ਦਾਸ ਬੇਲੇ ਨੇ ਗੋਲਮੰਦੀ ਫੌਜ ਆ ਬਣਦੀ ਐ ਉਹ ਗੁਰ ਵਿਚਾਰੇ 2-4 ਹੋਦਿਆਂ ਡਗੜ ਜਾਂਦੇ। ਪਰ ਆਈ ਜਾਂਨੇ ਗੁਰਲੇ ਬਣ ਦੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਖੇਖਿਆ ਨੇ ਉੱਥੋਂ। ਇਹ ਆਪਾਂ ਤਾਂ ਵਿਰੋਧੀ ਤੇ ਆ ਗਏ ਭਈ ਇਹਨਾਂ ਦਾ ਹੋ ਗਿਆ ਜੋਰ ਆਪਾਂ ਚੱਲੀਏ। ਠੀਕ ਹੈ ਪਰ ਇਹ ਦੇਖੀਏ ਜੀ ਆਪਾਂ ਜੀ ਪਹਿਲੇ ਸ਼ਲੋਕ ਚ ਕ੍ਰੋਧ ਕਟੋਰੀ ਸੀਗੀ ਦੂਸਰੇ ਚ ਮਨਸਾ ਕਟੋਰੀ ਸੀ। ਪਹਿਲੇ ਜ ਮੋਹ ਭਰੀ ਸੀ ਦੂਏ ਚ ਕੂੜ ਭਰੀ ਸੀ ਪਰ ਹੁਣ ਤੀਸਰੇ ਸ਼ਲੋਕ ਦੇ ਵਿੱਚ ਇਹ ਲਿਵ ਕਟੋਰੀ ਹੋਗੀ ਅੰਮ੍ਰਿਤ ਨਾਲ ਭਰ ਗਈ ਹਾਂਜੀ ਪਹਿਲਾ ਰਾਜਾ ਸੀ ਰਾਜਾ ਕੂੜ ਹੁੰਦਾ ਰਾਜਾ ਕੂੜ ਪਰ ਜਾ ਸਭ ਪਹਿਲਾ ਕਟੋਰੀ ਰਾਜੇ ਦੀ ਹੈ ਕੂੜ ਭਰੀ ਹੈ ਪਰਵਾਹ ਨਹੀਂ ਹੈ ਝੂਠੇ ਝੂਠਾ ਜਾਏ ਝੂਠ ਸਭ ਆਦਮੀ ਜੂੜ ਤੋਂ ਦਰਦਾ ਉਧ ਪਤੰਬਰੇ ਛੋੜ ਕਾਮਨਾ ਆਪਣੀ ਜੋਰ ਰਾਜੇ ਨੇ ਰਿໄລ ਤਿੰਨ ਸ਼ਲੋਕ ਸੀਗੇ ਜੀ ਇੱਥੇ ਇਸ ਪੌੜੀ ਨਾਲ ਤਿੰਨ ਸ਼ਲੋਕ ਹੈਗੇ ਹੁਣ ਆਪਾਂ ਪੌੜੀ ਸ਼ੁਰੂ ਕਰਦੇ ਆ ਜੀ ਪੌੜੀ ਆਪੇ ਸੁਰਨਰ ਗਣ ਗੰਦਰਵ ਆਪੇ ਖੜ ਦਰਸ਼ਨ ਕੀ ਬਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖੀ ਇਕਤਿ ਕਹਾਂ ਜੀਵਾਤਮਾ ਜੀ ਸੋ ਰਹਾ ਹੈ ਨਾ ਰਗਤਨ ਦੇ ਰੂਪ ਦੇ ਅੱਛਾ ਜੀ ਕਿਤੇ ਸੋ ਰਹਾ ਕਿਤੇ ਇਹਨਾਂ ਦੇ ਰਗ ਕਿਤੇ ਘਾਰੇ ਸੁਰਬੀਏ ਜੀਵਾਤਮਾ ਜੀ ਨਾ ਵੀ ਕੋਈ ਇਹ ਆਤਮਾ ਜੀ ਕਦਰ ਵੀ ਇਹ ਆਤਮਾ ਇਹਦੀ ਆਪਣੀ ਆਪਣੀ ਚਾਹਤ ਹੈ ਇਹਦੀ ਆਪਣੀ ਆਪਣੀ ਅੱਛਾ ਸੀ ਕੋਈ ਗਨਧਰਮ ਨੂੰ ਗਿਆ ਕੋਈ ਗਨ ਬਣ ਗਿਆ ਕੋਈ ਗੰਨ ਰਹਿ ਗਿਆ ਵਿਚਾਲੇ ਰਹਿ ਗਿਆ ਵਿਚਾਰਾ ਬਹੁਤ ਗਲਤੀ ਚ ਉਹ ਨਰ ਬਣ ਸਕਿਆ ਨਗਰਦਰ ਹੈ ਅੱਛਾ ਜੀ ਸੁਆਪ ਦੇਵਤੇ ਵਾਲਾ ਬਣਾ ਲਿਆ ਨਾਲ ਉਹ ਹੈ ਜਿਹੜਾ ਬਹਾਦਰੀ ਵੀ ਅੱਗੇ ਚਲਾ ਗਿਆ ਬਹਾਦਰੀ ਵਿਚ ਅੱਗੇ ਚਲਾ ਗਿਆ ਕਾਰਨ ਉਹ ਹੈ ਪਬਲਿਕ ਹੈ ਜਿਹੜੇ ਵਿੱਚ ਨਾ ਸੋਲਣੇ ਨਾ ਨਰਨੇ ਨੂੰ ਸੰਦਰਭਿਕ ਪਬਲਿਕ ਅਸਾਂ ਗੱਦਾਰ ਆ ਗੋਂਟ ਗਿਆ ਯਾਨੀ ਜਿਹਨਾਂ ਦੇ ਨਾਮਲੇ ਜਿਹੜੇ ਗਣਵੇਂ ਨਾਲ ਵਿੱਚ ਲੋਕ ਘਟਣ ਵਾਲੀ ਬਹੁਤ ਇਹ ਨਾਮ ਘਟਣ ਵਾਲੇ ਨਹੀਂ ਉਹਦਾ ਹੀ ਟੋਲਣਾ ਹੈ ਲੋਦੀ ਪਬਲਿਕ ਪਬਲਿਕ ਦੇ ਵਿੱਚ ਗਬਈਏ ਵੀ ਉਹਦੇ ਦੇ ਲੋਕ ਕਬੀ ਵੀ ਉਹਦੇ ਨਾਲ ਵਾਰ ਉਹਦੇ ਪਬਲਿਕ ਦੇ ਵਿੱਚ ਆਈ ਦੇ ਪਰ ਕੁਝ ਨਾ ਕੋਈ ਸੂਰਮੇ ਵੀ ਹੁੰਦੇ ਨੇ ਨਾਲ ਉਹਦੇ ਪਬਲਿਕ ਦੇ ਵਿੱਚ ਹੀ ਨੇ ਅੱਛਾ ਜੀ ਪਰ ਪਬਲਿਕ ਵੀ ਹੁੰਦੀ ਕਹਿਣ ਦਾ ਕੀ ਭਾਣਿਆ ਜੀ ਆਪੇ ਸੁਰਨਰ ਗੰਗੰਦਰ ਬਾ ਰੂਪ ਹੈ ਜੀ ਬਰੇ ਗਿਆ ਕੋਈ ਨਰ ਮੁਰ ਗਿਆ ਕੋਈ ਦਰ ਮੁਰ ਗਿਆ ਉਹ ਓਦਾਂ ਹੀ ਵਿਚਾਰਾ ਬਸ ਪਬਲਿਕ ਦੇ ਵਿੱਚ ਹੀ ਸੀ ਠੀਕ ਹੈ ਜੀ ਜੀ ਵੀਰ ਇਹ ਪਾਸ ਕਰਨਾ ਆਇਆ ਹੂੰ ਹੂੰ ਦਿਹਾਣੇ ਪਾਲ ਲੈ ਆਏ ਅੱਛਾ ਜੀ ਇੱਥੇ ਆਪਣੀ ਰੁਚੀ ਹੈ ਰੁਚੀ ਨਾਲ ਬਣਦਾ ਜੋ ਕੁਝ ਬਣਦਾ ਜੀ ਜੀਵਨ ਦੀ ਨੂੰ ਕੁਝ ਬਣਾਉਂਦੀ ਹੈ ਹੂੰ ਹੂੰ ਆਪੇ ਖੜ ਦਰਸ਼ਨ ਦਰਸ਼ਨ ਦੀ ਬਾਣੀ ਦਾ ਗਿਆਤਾ ਹੋ ਗਿਆ ਫਨ ਕਲਚਰ ਲਿਖੇ ਕਿ ਇਹ ਦਖਲ ਰਹਿ ਦੇਬੂ ਦੀ ਇਹਨੇ ਅੱਛਾ ਜੀ ਆਪੇ ਦਖਲ ਆ ਗਿਆ ਠੀਕ ਹੈ ਇਹ ਭਗਤ ਕਬੀਰ ਜੀ ਦੇ ਸ਼ਲੋਕ ਚ ਵੀ ਇਸ ਤਰ੍ਹਾਂ ਹੀ ਆਉਂਦਾ ਇੱਕ ਜਗ੍ਹਾ ਜੀ ਸੁਰਨਰ ਗਣਗੰ ਦਰਬ ਜਿਨ ਮੋਹੇ ਜੀ ਆਪੇ ਸੁਰਨਰ ਗਣਗੰ ਦਰਬ ਆਪੇ ਖਟ ਦਰਸ਼ਨ ਕੀ ਬਾਣੀ ਖਟ ਦਰਸ਼ਨ ਕੀ ਫਤਰੀ ਜਿਹੜੀ ਸੱਚੀ ਬਾਣੀ ਬਣਾਈ ਹੋਈ ਹੈ ਆਦਮੀ ਦੀ ਬੁੱਧੀ ਦਾ ਲੈਵਲ ਹੈ ਇਹ ਠੀਕ ਹੈ ਜੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖੀ ਅਕਥ ਕਹਾਣੀ ਆਪੇ ਜੇ ਕਿੰਮ ਕਰ ਕੋਈ ਸ਼ਿਵ ਬਣ ਗਿਆ ਕੋਈ ਸ਼ੰਕਰ ਬਣ ਗਿਆ ਤਾਂ ਵਿਸ਼ ਬਣ ਗਿਆ ਆਪੇ ਗੁਰਮੁਖੀ ਆਪੇ ਗੁਰਮੁਖ ਬਣ ਗਿਆ ਕੋਈ ਗੁਰਮੁਖ ਬਣ ਗਿਆ ਠੀਕ ਹੈ ਇਸ ਗੁਰਮੁਖ ਦੀ ਕਹਾਣੀ ਇਕੱਠ ਗੁਰਮੁਖ ਅਸਲ ਤੇ ਹੈ ਚਲਦਾ ਚਲਦਾ ਚਲਦਾ ਚਲਦਾ ਗੁਰਮੁਖ ਤੇ ਆ ਕੇ ਆਂਦਾ ਕਕਰਤ ਕਹਾਣੀ ਤੇ ਆ ਕੇ ਇਹ ਜੀਵ ਗੁਰੂਖੀਏ ਘੱਟ ਕਹਾਣੀ ਕਰਦਾ ਜਾ ਕੇ ਚਰੇ ਤੇ ਆਪੇ ਸ਼ਿਵ ਸ਼ੰਕਰ ਮਹੇਸ਼ਾ ਇਹ ਅਲੱਗ-ਅਲੱਗ ਚੀਜ਼ਾਂ ਹੋਰ ਆਮੀਆਂ ਦਿਗਲੀਆਂ ਹੋਣੀਆਂ ਨੇ ਤਨੋਂ ਵਿੱਚ ਹਾਂ ਹਾਂ ਇਹ ਵੇ ਰਾਟਾਈ ਕੋਈ ਇਤਨਾ ਉਰਨਦਾ ਇਹ ਅਗਲੇ ਮਹੀਨੇ ਦੇ ਡਿਗਰੀਆਂ ਨੇ 981008 ਉਹ ਐ ਕਿ ਭਾਰਾ ਫੜਾਈ ਹੋ ਜਾਂਦੇ ਕਿਸੇ ਨੇ ਬੇਚੀ ਹੈ ਜੀ ਇਹ ਬੇਚੀ ਨਹੀਂ ਹੈ ਜੀ ਇਹ ਜੋ ਗੁਰਦਵਾਲਾ ਬਾਦ ਨਾਲ ਕੀ ਗੁਣਾਂ ਦੇ ਹਿਸਾਬ ਨਾਲ ਡਿਗਰੀਆਂ ਤੇ ਮੰਨਦੀਆਂ ਅਲੱਗ-ਅਲੱਗ ਅਵਸਥਾਵਾਂ ਹੈ ਜੀ ਹਾਂ ਅਵਸਥਾ ਦੁੱਗ੍ਹੀ ਅਲੱਗ-ਅਲੱਗ ਆਪੇ ਜੋਗੀ ਆਪੇ ਭੋਗੀ ਆਪੇ ਸੰਿਆਸੀ ਫਿਰੇ ਬਿਵਾਨੀ ਆਪੇ ਜੋਗੀ ਹੈ ਆਪੇ ਭੋਗੀ ਆਪੇ ਸੰਿਆਸੀ ਹੈ ਜੀ ਆਪੇ ਨਾਲ ਗੋਸ਼ਟ ਆਪ ਉਪਦੇਸ਼ ਹੈ ਆਪੇ ਸੁਗੜ ਸਰੂਪ ਸਿਆਣੀ ਆਪਣੇ ਆਪ ਨਾਲ ਆਪ ਹੀ ਗੋਸ਼ਟੀ ਕਰਦਾ ਵਿਚਾਰ ਕਰਦਾ ਠੀਕ ਹੈ ਜੀ ਆਪਣੇ ਆਪ ਨਾਲ ਵਿਚਾਰ ਵੀ ਆਪੇ ਕਰਦਾ ਇਸ ਤਰੀਕੇ ਨਾਲ ਸੁਗੜ ਸਿਆਣਾ ਬਣ ਜੁਦਾ ਜੇ ਵਿਚਾਰਵਾਣ ਬਣ ਜੂਦਾ ਹਰਗੱਲ ਨੂੰ ਵਿਚਾਰਦਾ ਕਿ ਕੰਮ ਕਰਦਾ ਵਿਚਾਰਦਾ ਤੁਝ ਗੁੜਿਆ ਸੀ ਸਭ ਗੁਣ ਸਿਆਣਾ ਆਪ ਉਪਦੇਸ਼ ਦਿੰਦਾ ਹੈ ਵੀ ਮੈਂ ਇਹ ਕੰਮ ਕਰਨਾ ਆਪਣੇ ਆਪ ਨੂੰ ਉਪਦੇਸ਼ੇ ਦੱਸ ਰਸਤਾ ਗਲਤ ਚਲੇ ਗਿਆ ਫਿਰ ਵਾਪਸ ਆਉਂਦਾ ਅੱਛਾ ਰਸਤਾ ਗਲਤ ਹੈ ਨਾ ਤਾਂ ਸਿੱਧੇ ਰਸਤਾ ਛੱਡ ਕੇ ਵਾਪਸ ਆ ਜਾਂਦਾ ਠੀਕ ਹੈ ਜੀ ਆਪਣਾ ਚੋਜ ਕਰ ਵੇਖੇ ਆਪੇ ਆਪੇ ਸਬਨਾ ਜੀਆਂ ਕਾਹ ਹੈ ਜਾਣੀ ਆਪਣੇ ਚੋਣ ਕਰਕੇ ਆਪੇ ਦੇਖਦਾ ਹੈ ਇਹ ਤਜਰਬੇ ਕਰਦਾ ਹੈ ਕਦੇ ਚੰਗਾ ਬਣ ਜਾਂਦਾ ਹੈ ਕਦੇ ਮਾੜਾ ਬਣ ਜਾਂਦਾ ਕਦੇ ਪਿਆਰਬਾਨ ਬਣ ਜਾਂਦਾ ਪਰ ਇਹ ਪਰਮੇਸ਼ਰ ਦੀ ਗੱਲ ਨਹੀਂ ਲੱਗਦੀ ਜੀ ਇੱਥੇ ਇਹ ਜੀਵਾਪੇ ਕਰਦਾ ਫਿਰ ਨਹੀਂ ਫਿਰ ਇੱਥੇ ਆਪੇ ਸਭਨਾ ਜੀਆਂ ਕਾਹ ਜਾਣੀ ਪਰਮੇਸ਼ਰ ਤਾਂ ਜਨਮੇ ਦੀ ਲੱਗਦਾ ਪਰ ਹੁਣ ਆਪੇ ਸਭ ਨਾਲ ਜੀਆਂ ਕਾ ਲੇ ਤਾਂ ਹੁਣ ਇਹ ਤਾਂ ਇਹ ਤਾਂ ਸਾਰੇ ਆ ਗਏ ਇਹੀ ਸਮਾਂ ਜੀਆਂ ਦਾ ਜਾਣੀ ਹੋ ਜਾਊਗਾ ਐਸੇ ਨਿਕਲ ਗਿਆ ਸਭ ਨੇ ਜਾਣੀ ਹੋ ਗਿਆ ਬਾਕੀ ਨਹੀਂ ਸਾਡੇ ਦਾ ਗੋਲ ਦੇ ਜੀਆਂ ਦਾ ਜਾਣੇ ਵਾਰਿਆ ਤਾਂ ਠੀਕ ਹੈ ਜਦੋਂ ਚੌਥੇ ਪੱਜ ਪਹੁੰਚ ਜਾਂਦਾ ਤਵੇ ਜੀ ਆਪਾਂ ਜਾਣੀ ਠੀਕ ਹੈ ਜੀ ਹਾਂ ਜੀ ਇੱਥੇ 12ਵੀਂ ਪੜ੍ਹਾਈ ਸਮਾਪਤੀ ਹੈ ਜੀ